ਸ਼ਲੋਕ ਮਹੱਲਾ ਤੀਜਾ ਤ੍ਰਿਗ ਤਿਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਪਾਏ ਕਹਿਆ ਨਾ ਵੀ ਸੰਤ ਪੀੜ ਲੋ ਦੀ ਗੱਲ ਆ ਸਾਰਿਆਂ ਦੀ ਮਨਮੁਖ ਨੇ ਅਗਿਆਨੀ ਨੇ ਸਾਰੇ ਕਹਿੰਦੇ ਨੇ ਹਾਰੋਂ ਸੰਤ ਕਹਾਵਾ ਹਿਰਦੇ ਜਿਨਕੇ ਕਪੜੇ ਦਸ ਹੈ ਠੀਕ ਹੈ ਨੇ ਸੰਤ ਸੰਤਤਾ ਨਾ ਕਦੇ ਜਬੇ ਨਾ ਕਦੇ ਵਰਦਾ ਹੈ ਸ਼ਾਂਤੀ ਦਾ ਅਸੀਂ ਪ੍ਰਾਪਤ ਕਰ ਅਸੰਤ ਦਾ ਜਿਵੇਂ ਚੰਦਾ ਅਸੰਤ ਕਹ ਬੰਦਾ ਸੁੱਤਾ ਠੀਕ ਹੈ ਜੀ ਸ਼ਾਂਤੀ ਪ੍ਰਾਪਤ ਕਰ ਲਈਏ ਇਹਦਾ ਜਲਦੇ ਸੰਤ ਨੇ ਇਹਦਾ ਕੱਪੜੇ ਪਾ ਕੇ ਸੰਤ ਬਣ ਜਾਂਦੇ ਨੇ ਜੋ ਹਾਰਜੁਕ ਪਰਹਰ ਤਿਆਗ ਦੇ ਹਾਰਜੁਕ ਦਾ ਦਿੱਤਾ ਤਿਆਗ ਉਹ ਜਿਹਦੇ ਖਾਤੇ ਤੁਸੀਂ ਸੰਤ ਬਣੇ ਦੇ ਦਫਾ ਹੋਣ ਜੋ ਜਿੰਦਗੀ ਛੱਡੀ ਸੀ ਕੇ ਕਿਹੜੇ ਰੱਬ ਹੈ ਜੇ ਤੁਸੀਂ ਓਏ ਥੋੜੇ ਨਾ ਵੱਡੇ-ਵੱਡੇ ਤਾਂ ਵੀਰ ਆਦਮੀ ਬਿਠੇ ਰਹੇ ਹੈਲੀਕਾਪਟਰ ਉੱਤੇ ਉੱਤਰਦੇ ਕੀ ਸੁਖਾਦਾ ਦਿੱਤਾ ਠੇਕੋ ਲੋਕਾਂ ਨੂੰ ਤੁਸੀਂ ਬਗਦੇ ਝੋਲੀਆਂ ਚੁੱਕੀ ਫਿਰਦੇ ਲੋਕਾਂ ਨੇ ਕਾਰ ਕਰਾਉਂਦੇ ਇੱਕ ਬੁਢਾ ਸਤਾਰ ਬੰਦ ਖਾਤਰ ਪਤਾ ਨਹੀਂ ਇਹ ਤੈਨੂੰ ਪਤਾ ਸੁਣ ਲੈਂਦੇ ਨਰਕ ਜੀ ਨੂੰ ਤਾਂ ਤੁਸੀਂ ਖੁਦ ਚਲੇ ਗਏ ਤੁਸੀਂ ਵੀ ਜਲ ਪੇ ਨਰਕ ਤੋਂ ਦੂਰ ਰਹਿਣ ਲੈ ਠੀਕ ਹੈ ਪਾਪ ਕਮਾਈ ਦੁੱਖ ਹਉਮੈ ਪਾਪ ਕਮਲਾਈ ਤੁਹੀ ਜਾਨ ਨੇ ਹਮਲੇ ਵਿੱਚ ਪਾਪ ਖਬੂਦ ਦੇ ਨੇ ਉਹ ਰਸਤਾ ਫੜਿਆ ਸੰਤਾਂ ਨੇ ਇਲੈਕਸ਼ਨ ਲੜ ਕੇ ਆ ਗੁਰਦੁਆਰਾ ਉਹ ਰਾ ਫੜ ਲਿਆ ਵੀ ਬਚਿਆ ਹੀ ਨਹੀਂ ਕੋਈ ਉਹ ਜਿਵੇਂ ਫੈਦਾਂ ਦੇ ਹੱਥ ਘੜੀਆਂ ਆ ਗਈਆਂ ਲੈਣ ਲੱਗਣ ਲੱਗ ਜਾਨਗੀਆਂ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿੰਨ ਬੂਝ ਨਾ ਕਾਈ ਪਾਏ ਉਹ ਮਨਮੁਖਾਂ ਨੂੰ ਬਿਆਸ ਹੁੰਦੀ ਆ ਮਾਇਆ ਹੋ ਇਹਦਾ ਮਤਲਬਾ ਕੱਪੜੇ ਕੱਪੜੇ ਪਾਏ ਨੇ ਅੰਦਰੋਂ ਮਨਮੁਖ ਨੇ ਇਹ ਔਰੋਂ ਭੇਜੇ ਭੇਜਿਆ ਇਹਦਾ ਸਾਬਤ ਹੋ ਗਿਆ ਜਿਹੜੇ ਮਨਮੁਖਾਂ ਨੂੰ ਆਇਆ ਉਹ ਵਿਆਪਦਾ ਇਹ ਮਾਇਆ ਮੋਹਿਆਂ ਨੂੰ ਵਿਆਪਿਆ ਕਿਉਂ ਠੇਕ ਉੱਤੇ ਬਹਾਲਾ ਕੁਸ਼ੈ ਅੰਦਰੋਂ ਮਨਮੁਖ ਨੇ ਮਾਇਆ ਤੇ ਹੈ ਹਾਂਜੀ ਹਲਤ ਪਲਤ ਉਹ ਸੁੱਖ ਨਾ ਪਾਵੇ ਅੰਤ ਗਏ ਪਛਤਾਏ ਨਾ ਤਵਨਾਂ ਨੂੰ ਇੱਥੇ ਸੁਖ ਹੈ ਹਲਤ ਹਲਤੋਂ ਨਾ ਜੇ ਆ ਸਾਰੇ ਹਲਤ ਹੈ ਕਹਤੇ ਇਹਦਾ ਸਭ ਕੁਝ ਇਥੇ ਸਭ ਕੁ ਮਾਇਆ ਵਿੱਚ ਸੁਖ ਹੈ ਨਾ ਪਲ ਤਨ ਨਾ ਮਾਇਆ ਤੋਂ ਸੁਖ ਹੈ ਅੰਤ ਗਏ ਅੰਤ ਅੰਤ ਮੇਲੇ ਤਸਤਾਂ ਗੁਰ ਪ੍ਰਸਾਦੀ ਕੋ ਨਾਮ ਤੇ ਆਏ ਇਸ ਹਉਮੈ ਵਿੱਚੋਂ ਜਾਈ ਜਿਹਦੇ ਤੇ ਗਿਆਨ ਦੀ ਕਿਰਪਾ ਕੋ ਜਨਨ ਬਜੇ ਨੇ ਸੰਤ ਉਹ ਗੁਰ ਕਿਰਪਾ ਨਾਲ ਨਾਮ ਉਹਨਾਂ ਦਾ ਨਾਮ ਜਿ ਧਿਆਨ ਉਹਨਾਂ ਚੋਂ ਹੋ ਵੀ ਜਾ ਸਕਦੀ ਹੈ ਨੇ ਰੁੜ ਕੇ ਵੇਲੇ ਬਾਣੀ ਚ ਧਾਰ ਕਹਿੰਦਾ ਇਹਦਾ ਕਾਲੀ ਧਾਰ ਜਿ ਡੁੱਬ ਗਏ ਅਗੇ ਆਮਦਾ ਅਗਿਆਨਤਾ ਦੀ ਕਾਲੀਤਾ ਜਿ ਡੁੱਬ ਕੇ ਤਾਂ ਕਹੇ ਆਨਕ ਜਿਸ ਪੂਰਵ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਏ ਇਹਨੇ ਪਹਿਲਾਂ ਹੀ ਮੰਨਿਆ ਹੋਇਆ ਵੀ ਭਾਈ ਕੁਝ ਵੀ ਹੋ ਜਵੇ ਗੁਰੂ ਦੇ ਚਲਦੀ ਸਰਣਾ ਸੀ ਤਾਂ ਸਿੱਖੀ ਲਈਆ ਜੀਵਨ ਸਾਰਾ ਸਿੱਖੀ ਵਾਸਤੇ ਦਿੱਤਾ ਸਿੱਖੀ ਦੇ ਨਾਲ ਲੱਗੇ ਉਹ ਸੱਚ ਸੋਝੀ ਸਾਨੂੰ ਚਾਹੀਦੀ ਹੈ ਗੁਰੂ ਕਰੇ ਸਾਨੂੰ ਸਾਰਾ ਨਾਮ ਇਹ ਮਿਲ ਜੇ ਜਾਨਤੀ ਸੱਚੀ ਹੋ ਜਾਏ ਉਹ ਅਨੋਲ ਨੇ ਉਹਦੀ ਹਿਲਦੇ ਹੁੰਦੇ ਉਹ ਜਿਨ੍ਹਾਂ ਨੇ ਪੂਰਬ ਲਿਖਿਆ ਹੋਇਆ ਇਹਨਾਂ ਨੇ ਲਿਖਿਆ ਤੇ ਚੱਲ ਕੇ ਘੋੜੇ ਤੇ ਚੱਲਣਾ ਸੌਖਾ ਗਦੇ ਤੇ ਖੜੇ ਹੋ ਜਾਓ ਤੇ ਚੱਲ ਆਏ ਪਾਏ ਉਹ ਗੁਰ ਚਰਣੀ ਨੇ ਆ ਕੇ ਕਿਸ ਦਾ ਪੂਰਬ ਲੈ ਗਿਆ ਹੰਤਾ ਉਹ ਨਹੀਂ ਹੁੰਦੇ ਉਹ ਡੋਲ ਰਹੇ ਨਾ ਇਲੈਕਸ਼ਨ ਬਣ ਚਾਕਣ ਨਾ ਭਾਇਆ ਬਣ ਚਾਕਣ ਮਹੱਲਾ ਤੀਜਾ ਮਨਮੁਖ ਉਦ ਦਾ ਹੈ ਨਾ ਤਿਸ ਭਗਤੀ ਦਾ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਹੈ ਉਪਾਉ ਕੋਈ ਮੋਗਾ ਕੀ ਹੈ ਉਦ ਦਾ ਹੈ ਕੰਦੇ ਯੋਨ ਉਲਟਾ ਕਰਕੇ ਰੱਖਦੀ ਏ ਕਉਲੇ ਨੂੰ ਉਲਟਾ ਕਰਕੇ ਸਾਰੀ ਬਰਸਾਤ ਤਿਆ ਰਹਿ ਵਾਰ ਖਾਲੀ ਖਾਲੀ ਰਹੂ ਕੁੱਲ ਕਾਲ ਜਿਆਦਾ ਠੀਕ ਲੱਗਦਾ ਹਾਂਜੀ ਹਾਂ ਕੌਲਾ ਕੌਲਾ ਕੀਤਾ ਠੀਕ ਐ ਜੀ ਮਨਮੁਖ ਜਿਹੜਾ ਉਲਟਾ ਹੋਇਆ ਹੋਇਆ ਮੁੱਢਾ ਹੋਇਆ ਹੈ ਜੀ ਪਿਆ ਗਿਆਨ ਤਾਂ ਪਹਿਲਾਂ ਨਹੀਂ ਦਰੋਦੇ ਕਉਲੇ ਦਾ ਮਾਇਆ ਵੀ ਗੱਲ ਲੈ ਉੱਦ ਦਾ ਕੌਲ ਉਹ ਨਾ ਜਿਵੇਂ ਆਂਡ ਬੋਤੀਏ ਪਾਣੀ ਚ ਪਰ ਜਾਂਦਾ ਭਾਜਾ ਕੱਢੀ ਦਾ ਖਾਲੀ ਹੋ ਨਿਕਲਦਾ ਪਾਣੀ ਦੰਦੇ ਰਹਿ ਜਾਂਦਾ ਜਾਂਦੀ ਮਾਇਆਵਲੀ ਨਾਲ ਕੱਢਣਾ ਵੀ ਤਾਂ ਉੱਦ ਆਈ ਹੈ ਹਾਂਜੀ ਉਹ ਵਿਚਾਰਾ ਖਾਲੀ ਰਖਦੀ ਖਾਲੀ ਰਖਦੀ ਮਨਮਕ ਉੱਦ ਕੌਲ ਹੈ ਨਾ ਇਸ ਭਗਤੀ ਨਾ ਭਗਤੀ ਨਾ ਹੇ ਜਿਹੜੇ ਉੱਦੇ ਖੌਲ ਵਾਲੇ ਨੇ ਜਿੱਦਾਂ ਵੀ ਖੜੇ ਨੇ ਇਲੈਕਸ਼ਨ 'ਚ ਇਹ ਇੱਕ ਆਦਮੀ ਦੱਸੇ ਤਬਦੀ ਕੀ ਹੁੰਦੀ ਹੈ ਨਾਮ ਕੀ ਹੁੰਦਾ ਕੁਰਬਾਨੀ ਕਹਿੰਦੀ ਹੈ ਉਹਨਾਂ ਕੋ ਨਾਮ ਅਰ ਤਬਦੀ ਦੋਏ ਜੀਉ ਤੇ ਇਹਨਾਂ ਦੇ ਕਾਹ ਦੀ ਸ਼ਬਦ ਕਰੇ ਤਬਦੀ ਜਾਂਦੇ ਇਹਨਾਂ ਦੀ ਦਿੱਤਾ ਕੋਈ ਆਵੇ ਤਾਂ ਨਹੀਂ ਜਾਂਦੇ ਸ਼ਕਤੀ ਅੰਦਰ ਵਰਤਦਾ ਕੂੜ ਹੈ ਉਪਾਉ ਸ਼ਕਤੀ ਅੰਦਰ ਵਰਤਦਾ ਸ਼ਕਤੀ ਦੇ ਅੰਦਰ ਵਰਤਦਾ ਸ਼ਕਤੀ ਬੁੱਧੀ है ਹੈ ਅੱਛਾ ਜੀ ਬੁੱਧਵਲ ਠੀਕ ਹੈ ਜੀ ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਉ ਪਰ ਉਹ ਪੁੱਠੇ ਪਾਸੇ ਲਾਉਂਦਾ ਬੁੱਧੀ ਨੂੰ ਹੈ ਜੀ ਤੇ ਅੰਦਰ ਵਰਤਦਾ ਸ਼ਕਤੀ ਹੈ ਹਾਂ ਖੱਟਦਾ ਕੀ ਹੈ ਕੂੜ ਠੀਕ ਔ ਤੂੰ ਚੇਤਨ ਚੜਦੇ ਰਹੇ ਕਿਸ ਕਾ ਕਾਜ ਤਰੇਕੇ ਤੇ ਨ ਕਾਉਂ ਤਹੀ ਗਿਆ ਅਬਰ ਕਾਜ ਨੇ ਅਬਰ ਕਾਜ ਤਰੇਕੇ ਤੇ ਨ ਕਾਉਂ ਬਿਰਜਾਤ ਰੰਗ ਤੇ ਪਾਜ ਕੇਵਲ ਸਰੰਜਾਮ ਲਾਗ ਪਵਿਲ ਤਲਕੇ ਚਰਮ ਤੇ ਇਹ ਚਾਰੇ ਬੰਕਤੀਆਂ ਸਾਰੀ ਸਪਸ਼ਟ ਗੱਲ ਕਰੀ ਜਾਂਦੀ ਜਿਤਨੇ ਵੀ ਕਰਦੇ ਨੇ ਕਰਦੇ ਨੇ ਪੜਦੇ ਨੇ ਆ ਫਿਰ ਵੀ ਹੈ ਕਿ ਸਤਿ ਕਿ ਤੁੱਲ ਨੂੰ ਅੰਨਿਆ ਸੋਖੀਆਂ ਲੈਣਾਂ ਦੀ ਸਮਝ ਨੂੰ ਤਾਂ ਨੂੰ ਆਲਾ ਕੀ ਸਮਝਾਉਗੇ ਤੁਸੀਂ ਸੈਂ ਦਾ ਭਾਵ ਹੈ ਵੀ ਜਿਹੜੀ ਸ਼ਕਤੀ ਹੈ ਉਹਦੀ ਦੁਰਵਰਤੋਂ ਕਰ ਰਿਹਾ ਚੇਤਨ ਸ਼ਕਤੀ ਦੀ ਦੁਰਵਰਤੋਂ ਮਾਇਆ ਵਾਸਤੇ ਕਰ ਰਿਹਾ ਕੀ ਹੁੰਦੀ ਹੈ ਚਾਹੀਦਾ ਤਾਂ ਚੇਤਨ ਦਾ ਗਿਆਨ ਇਕੱਠਾ ਕਰਨਾ ਸੀ ਪਰ ਜੜ ਵਸਤੂ ਦਾ ਗਿਆਨ ਇਕੱਠਾ ਕਰ ਰਿਹਾ ਉੱਪਰ ਚਾਲਤਾ ਲਿਆ ਜੀ ਕਾ ਦਖਲ ਵਾਸਤੇ ਆਪਣੇ ਵਾਸਤੇ ਆਪਣੇ ਕਰਨ ਤੇ ਰੱਖ ਕੇ ਘੋੜਾ ਦੱਬ ਲਿਆ ਹਾਂਜੀ ਵਧੀਆ ਫੀਕਾ ਲਾਓ ਗੁਰਬਾਣੀ ਜੀ ਦੀ ਮਰਜ਼ੀ ਸੁਣਵੇ ਵਿਆਖਿਆ ਜੀ ਦੀ ਮਰਜ਼ੀ ਸੁਣਵੇ ਅੰਦਰੋਂ ਚੇਤੋਂ ਦਾ ਭਿਜਦਾ ਨਹੀਂ ਹੈ ਵਿਸ਼ਵਾਸ ਨਹੀਂ ਕਰਦਾ ਗੁਰਬਾਣੀ ਜਿਹੜੇ ਬੋਲ ਕਰਦਾ ਧਰਮ ਦੇ ਹੋ ਸਾਰੇ ਕੂੜੇ ਨੂੰ ਝੂਠੇ ਦੀ ਰਿਵਾਜ ਦਾ ਕੂੜਾ ਵਾਲੇ ਕਰਦਾ ਕਰ ਰਿਹਾ ਤੇ ਸਤ ਤੇ ਸਕਾਇਆ ਕੋں ਤਾਂ ਵੀ ਅੰਦਰ ਨਹੀਂ ਜਿਹੜਾ ਕਿਤੋਂ ਉਹ ਗੁਰਬਾਣੀ ਨਾਲ ਪਿੱਛਾਈ ਗੁਰਬਾਣੀ ਤੇ ਭਰੋਸਾ ਹੀ ਦੀ ਕਰਦਾ ਇਹ ਕਰਕੇ ਉਹਦੇ ਮੁੱਖ ਦੇ ਵਿੱਚੋਂ ਫਿੱਕੇ ਬੋਲ ਨਿਕਲਦੇ ਨੇ ਕੱਚੀ ਬਾਣੀ ਨਿਕਲਦੀ ਐ ਆਹ ਇਹ ਰੋਜ ਤੋਂ ਹੁੰਦਾ ਨਾ ਇਹਨਾਂ ਦੇ ਉਹ ਸਾਰੀ ਕੱਚੀ ਬਾਣੀ ਐ ਸਾਰੇ ਟੀਕੇ ਰੱਦ ਕਰਤੇ ਇਹਨਾਂ ਨੇ ਉਹੀ ਫੇਰ ਪੜੀ ਜਾਂਦੇ ਨੇ ਬੋਲਦੇ ਨੇ ਸਾਰੀ ਕੱਚੀ ਬਾਣੀ ਬੋਲਦੇ ਨੇ ਕੱਚ ਬੋਲਦੇ ਨੇ ਕੱਚ ਪਿਛ ਬੋਲਦੇ ਨੇ ਕੱਚ ਪਿਛ ਕੋਈ ਧਰਮ ਰਲਾਏ ਨਾ ਰਲਣ ਉਹਨਾਂ ਅੰਦਰ ਕੂੜ ਸੁਆਉਂ ਉਹ ਜੇ ਉਹਨਾਂ ਨਾਲ ਜਾਇਆ ਵੀ ਅਸੀਂ ਇਹਨਾਂ ਨੂੰ ਤਾਲਬ ਬਣਾ ਲਈਏ ਆਪਾਂ ਕੋਸ਼ਿਸ਼ ਕਰੀਏ ਜਾ ਕੇ ਉਹਨਾਂ ਨੂੰ ਕਹੀਏ ਨਾ ਭਾਈ ਤੁਸੀਂ ਤਰ ਬਣ ਜਓ ਗੁਰੂ ਕਾਹਦੇ ਕੋਸ਼ਿਸ਼ ਕੀਤੀ ਹੋਈ ਹੈ ਜਿਹੜੇ ਰੁਸ ਕੇ ਗਏ ਹੋਏ ਤੇ ਠੀਕ ਹੈ ਜੀ ਉਹ ਤਾਲਬ ਜੇ ਰਲ ਆਏ ਰਲਦੇ ਜਿੰਨਾ ਮਰਜ਼ੀ ਜੋਰ ਲਾ ਲਿਓ ਤੁਸੀਂ ਉਹਨਾਂ ਨਾਲ ਜੋ ਮਰਜ਼ੀ ਕਹਿ ਲਓ ਉਹ ਦੀ ਰੱਤੇ ਹਨ ਇੱਧਰ ਤੁਹਾਡੇ ਨਾਲ ਤਾਰਮਕ ਬੰਧਿਆ ਜੇ ਉਹਨਾਂ ਨਾਲ ਠੀਕ ਹੈ ਜੀ ਉਹਨਾਂ ਅੰਦਰ ਕੂੜ ਸੁਆਉਂ ਪਾਰ ਤੇ ਆ ਦਾ ਕੂੜ ਹੈ ਠੀਕ ਉਹਨਾਂ ਦਾ ਜੋ ਟਾਰਗੇਟ ਹੈ ਵਾਇਆ ਟਾਰਗੇਟ ਹੈ ਬੋਲਣਾ ਨਹੀਂ ਟਾਰਗੇਟ ਹੈ ਜਿਹਨਾਂ ਦਾ ਟਾਰਗੇਟ ਉਹ ਧਰਮਕ ਜਿਵੇਂ ਵੜਜੁਰਗੇ ਦੁਨੀਆ ਦੀਆਂ ਵਡਿਆਈਆਂ ਨੇ ਨਾ ਜਲਣ ਨਾਨਕ ਕਰਤਾ ਬੰਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਮ ਖੇਡ ਬਣਾਈਏ ਨੇ ਗੁਰਮੁਖ ਜੁਰਬੋਲ ਬੋਲ ਬੁਝਾ ਜਾਂਦੇ ਨੇ. ਗੁਰਮੁਖ ਨੇ ਗੁਰਮੁਖ ਤਰੇ ਜਪ ਹਰ ਨਾਮ ਉਹ ਜਪ ਕੇ ਜਾਂਦੇ ਨੇ ਨਾਲੇ ਸਭ ਨੂੰ ਧਪੜਾਈ ਜਾਂਦੇ ਨਾਲੇ ਚੜੀ ਜਾਂਦੇ ਆਹ ਉਹ ਕਹਿੰਦੇ ਨੇ ਸਰਪੰਨਿਆ ਦੇ ਆ ਕਰਨ ਵਾਲਾ ਸੁਭਜਦਾ ਸੰਤ ਹੋਣ ਤਾਂ ਇਹ ਠੀਕ ਹੈ ਜੀ ਔਰ ਜਦ ਜੀਤ ਨੂੰ ਪਿਆਗ ਨਹੀਂ ਬਲਬੜੇ ਜੇ ਕੋ ਚੋਰ ਕੈਦ ਵਿੱਚ ਮੈਂ ਸੰਤਾ ਵੀ ਮੇਰੀ ਦਇਆ ਨਾ ਕਰੋ ਹੁਣ ਤਾਂ ਛੜ ਦਿੰਗੇ ਉਹਨੂੰ ਗੁਰਮੁਖ ਤਰੇ ਜਪਰ ਨਾਉ ਗੁਰਮੁਖ ਤਰ ਜੰਮਨੇ ਆਹ ਨਾਮ ਜਪ ਕੇ ਪੌੜੀ ਬਿਨ ਬੁਝੇ ਵੱਡਾ ਵੱਡਾ ਫੇਰ ਫਿਰ ਪੈ ਗਿਆ ਜਿਹੜਾ ਸਿੱਧਾ ਬਨਾ ਜਿਹਨੇ ਨਾਮ ਨਹੀਂ ਨਾ ਪੁੱਛਿਆ ਦੁਬਾਰਾ ਚੱਕਰ ਫੇਰ ਪੈ ਗਿਆ ਜਿਹ ਬਿਲਕੁਲ ਫੇਰ ਪੈ ਗਿਆ ਸਿਰਫ ਗਲਤੀ ਕੀ ਹੋਈ ਪੁੱਛਿਆ ਦੀ ਨਾਲ ਦੀ ਬੁੱਝੀ ਗੁਰੂ ਨੇ ਕੀ ਗਿਆ ਬੁੱਝੀ ਗੱਲ ਉਹਨੂੰ ਧਿਆਨ ਦੀ ਦਿੱਤਾ ਵੱਡਾ ਫੇਰ ਫੇਰ ਪੈ ਗਿਆ ਵਾ ਫੇਰ ਸਿੱਧਾ ਲਾ ਦੂਗਾ ਸਤਗੁਰੂ ਕੀ ਸੇਵਾ ਨਾ ਕੀਤਿਆਂ ਅੰਤ ਗਿਆ ਪਛਤਾਇ। ਜੇ ਬਾਣੇ ਚਲੀਆ ਵਰਕੇ ਬਾਣੇ ਦੀ ਚਲਿਆ ਗੁਰਮਤਿ ਦਾ ਪ੍ਰਚਾਰ ਨਹੀਂ ਕੀਤਾ ਗੁਰਮਤਿ ਦਾ ਜੀਵਨ ਜਿਉਇਆ ਅੰਤ ਗਿਆ ਪਛਤਾਇ। ਲੱਗਣੀਆਂ ਨੇ ਪਸਾਂ ਸਿੱਧੀਆਂ। ਇੱਥੇ ਵੀ ਲੱਗ ਜਾਣੀਆਂ ਨੇ ਇਹ ਵੀ ਨਹੀਂ ਪਤਾ ਕਿਹਾਂ ਦਾ ਗਾਂ ਦੇਖਣੀਆਂ ਨਹੀਂ ਇੱਥੇ ਜਾਂਦੀਆਂ ਨੇ ਰੋਕਾਂ ਦੇ। ਇਹ ਗਾਇ ਪਰ ਇਹਦਾ ਗਏ ਦੀ ਗੱਲ ਹੈ ਨਾ ਅੰਤ ਗਿਆ ਪਛਤਾਏ ਜਿਹੜੇ ਹੁਣ ਲੱਗ ਜੂ ਕਿ ਉਹ ਅੰਤ ਕਿਤੇ ਕੰਮ ਹੋ ਪਹਿਲੇ ਯਾਦ ਆ ਜੀ ਆਪਣੀ ਕਿਰਪਾ ਕਰੇ ਗੁਰ ਪਾਈਐ ਆਪ ਗਵਾਈ ਕ੍ਰਿਸ਼ਨਾ ਔਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਆਪਣੀ ਕਿਰਪਾ ਕਰੇ ਗੁਰ ਕੋਣਾ ਕਰੇ ਕਰਪਾ ਆਪਣੀ ਮਨ ਕਰੇ ਹੈ ਤਾਂ ਮਾਨ ਆਪਣੀ ਕਿਰਪਾ ਕਰੇ ਪਹਿਲਾ ਮਾਨ ਪਹਿਲਾ ਆਪਣੀ ਹੱਦ ਧਰ ਛੱਡੇ ਠੀਕ ਹੈ ਜੀ ਆ ਕਿਰਪਾ ਕਰ ਲਵੇ ਆਪੇ ਜੀਵਾ ਹੋ ਜਵੇ ਹਾਰਪੀਲ ਵਿੱਚ ਛੋਟਾ ਬਣ ਜਵੇ ਛੋਟਾ ਹੈ ਉਹ ਛੋਟਾ ਛੋਟਾ ਹੀ ਬਣ ਜਵੇ ਅਗਿਆਨੀ ਹੈ ਬੰਦਨ ਤੇ ਬੈਠਾ ਅਗਿਆਨੀ ਆ ਆ ਸੁਭ ਜਿਵੇਂ ਅਸੀਂ ਮਤ ਥੋੜੀ ਲੱਗੀ ਆ ਹਾਂਜੀ ਗਿਆਨ ਹੋਣ ਲੱਗਿਆ ਗਿਆਨ ਹੋਣਾ ਸ਼ੁਰੂ ਹੋ ਗਿਆ ਕੁਛ ਨਾ ਕੁਛ ਪ੍ਰਾਪਤ ਹੋ ਗਿਆ ਜੇਰਾ ਕੁਝ ਪ੍ਰਾਪਤ ਹੋਏ ਤੋਂ ਬਾਅਦ ਆਪਣੀ ਮਤ ਥੋੜੀ ਲੱਗੀ ਆ ਉਹ ਵੱਡਾ ਆਪਣੀ ਮਤ ਨਾਲ ਵੱਡਾ ਪ੍ਰਾਪਤ ਹੋ ਗਿਆ ਤਾਂ ਛੋੜੀ ਲੱਗੀ ਆ ਕੋਈ ਵੱਡੀ ਚੀਜ਼ ਦੇਖ ਲਈ ਤਾਂ ਛੋੜੀ ਲੱਗੀ ਆਪਣੀ ਠੀਕ ਹੈ ਜੀ ਦੇਖਿਆ ਉਹ ਮੈਸ ਵੱਡੀ ਲੱਗਦੀ ਸੀ ਆ ਛੋਟੇ ਤੇ ਸਾਂਭੜ ਵੱਡੀਆਂ ਜਾਂ ਹਾਥੀ ਦੇ ਘੈਰ ਆ ਬੜੇ ਬੜੇ ਜਾਨਵਰ ਉਹਨੇ ਵਿਚੋ ਆਪ ਗਵਾਰੀ ਫੇਰਦਾ ਆਪਣੀ ਮਰਜੀ ਉਹ ਖਤਮ ਠੀਕ ਹੈ ਜੀ ਆਪਣਾ ਆਪ ਨਿਕਲ ਜਾਂਦਾ ਵਿੱਚੋਂ ਫਿਰ ਗੁਰ ਦੁੱਖਾਂ ਦਾ ਠੀਕ ਹੈ ਤੇ ਸਾਰੇ ਕੰਮ ਗੁਰਦੇ ਚ ਜੁਗੂ ਦਿੰਦਾ ਗੁਰ mera ਸੰਤ ਸਦਾ ਹੈ ਗੁਰਦਾ ਕੀਤਾ ਹੋਇਆ ਕਬ ਤੇ ਬਿੜੂ ਗੁਰਦੇ ਚ ਬੇਰੇ ਜੁਬੇੜੀ ਸਿਭਰੂ ਤਾ ਉਹਦੇ ਜਿਪੂ ਬੜੇ ਜਿਪੂ ਬੜੀਆਂ ਹਾਂਜੀ ਤ੍ਰਿਸ਼ਨਾ ਭੁੱਖ ਵਿੱਚੋਂ ਉੱਤਰੈ ਸੁਖ ਵਸੈ ਮਨ ਆਈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰ ਜਾਂਦੀ ਹੈ ਸੁਖ ਆਕੇ ਬੁੱਧ ਵਸ ਜਾਂਦਾ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀ ਹੈ ਹਿਰਦੈ ਲਿਬਲਾਈ ਆਹ ਗੱਲ ਹੈ ਇੰਪੋਰਟੈਂਟ ਸਦਾ ਹੀ ਸਲਾਹਾ ਜੁੜਿਆ ਰਹਿੰਦਾ ਇਸ ਕਰਕੇ ਕਿਹਾ ਸੀ ਪਹਿਲੀ ਪੰਕਤੀ ਤੇ ਇਹ ਭੁੱਲਦਾ ਹੀ ਨਹੀਂ ਇਹ ਵਿਚਰਦਾ ਹੀ ਨਹੀਂ ਘਟਦਾ ਹੀ ਨਹੀਂ ਇਹ ਜੋ ਸਦਾ ਸਦਾ ਹੋਰ ਕੋਈ ਲੈ ਲੋ ਸਦਾ ਤੁਸੀਂ ਇਹਦੇ ਨਾਲ ਜੁੜੇ ਦੀਦਾ ਸਭ ਨਾ ਮਾੜੀ ਨਾਲ ਸਦਾ ਸਦਾ ਸਲਾਈਏ ਵਾਲੀ ਵਕਤਾਂ ਜਾਂ ਹੋ ਸਾਥ ਸਾ ਕੀ ਤੱਕ ਬਿਛੜੇ ਦੀ ਦਸਤ